ਅਮਿਓ ਰਸਨਾ ਬਦਨ ਸਰਦਾਤ ਅ ਲਖ ਅਪਾਰ ਗੁਰ ਸੂਰ ਸ਼ਬਦ ਹਉਮੈ ਨਿਵਾਰਿਓ ਹਾਂਜੀ ਅਮਿਓ ਰਸਨਾ ਹਾਂਜੀ ਰਸਨਾ ਵਿੱਚੋਂ ਰਸਨਾ ਵਿੱਚੋਂ ਅੰਮ੍ਰਿਤ ਵਰਸਦਾ ਹੂੰ ਹੂੰ ਔਰ ਜੋ ਬੋਲਦੇ ਨੇ ਉਹ ਜੋ ਕੁਝ ਮਜ਼ਾ ਲੋਕਾਂ ਨੂੰ ਬੰਦ ਬਰਦਾ ਹੂੰ ਹੂੰ ਹੋ ਜੀ ਅ ਲਖ ਬਰਦਾ ਅ ਲਖ ਬਰਦਾਤੀ ਹਾਂਜੀ ਅ ਲਖ ਪਾਰ ਗੁਰੂ ਅਕਸ਼ੂਰ ਹੈ ਸੂਰ ਸੂਰਬ ਹੂੰ ਸ਼ਬਦ ਦਾ ਸ਼ੁਕਰ ਮੈਂ ਹੂੰ ਹੂੰ ਕਿਹੜਾ ਗੁਰਾਇ ਸ਼ਬਦ ਤੂਰ ਹੈ ਹੂੰ ਹੂੰ ਸ਼ਬਦ ਦੇ ਵਿੱਚ ਸ਼ਕਤੀ ਹੈ ਹੂੰ ਹੂੰ ਕਿਹੜਾ ਸ਼ਬਦ ਹੈ ਹੋ ਹੂੰ ਹੂੰ ਕੱਤੀ ਖਾਲੀ ਹੈ ਜੇ ਸ਼ਬਦ ਦੇ ਵਿੱਚ ਕਹਿੰਦੇ ਜੇ ਹੋਵੇ ਨਾ ਕਿ ਜੀ ਹੋਏ ਤਾਂ ਉੱਗਵੇ ਹੂੰ ਹੂੰ ਕਿ ਜਾਪ ਤਾਂ ਅਸਰ ਕਰਦਾ ਇਹ ਨਹੀਂ ਤਾਂ ਜਿਹੜੇ ਕਾਜੀਆ ਬੋਬਨਾ ਸੀ ਗਲਤ ਸੀ ਆ ਜਾਂਦਾ ਫਿਰ ਕੱਲ ਜਿਆਦੀ ਜਾਂਦੀ ਹੂੰ ਹੂੰ ਕੱਲ ਥੱਕ ਜਾਂਦੀ ਆ ਕਰ ਸਕਦੀ ਹੂੰ ਹੂੰ ਸੂਰ ਮਾ ਜੇ ਥੱਕ ਜੇ ਵੇ ਫਿਰ ਉਹਨੇ ਕੀ ਕਰਦਾ ਜੇ ਥੱਕਿਆ ਥਕਦਾ ਨਹੀਂ ਉਹ ਹੀ ਦੀ ਤੱਕ ਜਾਂਦਾ ਜਰੀਰ ਬੁੱਢਾ ਹੋ ਜਾਂਦਾ ਪੁਰਾਣਾ ਹੋ ਜਾਂਦਾ ਹੂੰ ਹੂੰ ਉਦੋਂ ਤੱਕ ਜਦ ਨਾ ਜਰ ਪੂਰੀ ਸ਼ਕਤੀ ਹੈ ਉਹਦੇ ਵਿੱਚ ਠੀਕ ਹੈ ਸ਼ਕਤੀ ਦੀ ਸ਼ਕਤੀ ਤੇ ਜਿੱਤ ਕੋਈ ਇਸ ਸ਼ਬਦ ਨੂੰ ਹਰਾ ਨਹੀਂ ਸਕਦਾ ਹੂੰ ਹੂੰ ਇਹ ਤੋਂ ਸੂਰ ਬੁੱਧੀ ਕਰਕੇ ਜਦੋਂ ਡਰਦਾ ਨਹੀਂ ਸੱਚ ਇਹਨਾਂ ਦਾ ਹੋ ਕੇ ਗੱਲ ਕਰਦਾ ਹੈ ਹੂੰ ਹੂੰ ਰਾਜੇ ਜੀ ਬਤਾ ਕਦਮ ਕੁੱਤੇ ਵੀ ਕਹਿੰਦਾ ਦੇ ਵੀ ਸੂਰ ਹੈ ਹੂੰ ਹੈ ਪ੍ਰਤੀਕ ਹੈ ਠੀਕ ਹੈ ਜੀ ਹੋਰ ਨਵਾਰੋ ਨਵਾਰਿਓ ਕਾਰ ਦੀ ਕਰਦਾ ਹੈ ਹਾਂ ਕਾਰ ਦੇ ਖਿਲਾਫ ਹੈ ਇਹ ਸ਼ਬਦ ਹੂੰ ਹੂੰ ਹੂੰ ਕਾਰ ਦੂਰ ਕਰਨ ਵਾਲਾ ਯਾ ਆਪਣਾ ਵੀ ਲੋਕਾਂ ਸੁਣ ਵਾਲਿਆਂ ਹੁੰਦਾ ਹੋਵੇ ਨਾਮ ਹੁੰਦਾ ਸੁਣਨ ਵਾਲੇ ਦਾ ਹੰਕਾਰ ਦੂਰ ਕਰਦਾ ਹੈ ਤੇ ਪ੍ਰਹਾਰ ਕਰਦਾ ਹੈ ਕਰਪ ਤੇ ਪ੍ਰਹਾਰ ਕਰਦਾ ਹੈ ਹਾਂਜੀ ਪੰਜ ਪੰਜ ਹਰ nidlio shun sahaj nij kar saharyo panchhar panchhar haan ji chalio h hum ton sahaj nij ਕੰਟਰੋਲ ਕਰਦੇ ਬਿਲਕੁਲ ਹੀ ਤੇ ਭਾਣ ਕਰਦੇ ਦਲੀਆ ਬਣਾਤਾ ਇਹਨਾਂ ਦਾ ਇਹ ਜੰਮ ਜੋ ਕਦੀ ਛੱਡੇ ਦੁਬਾਰਾ ਦੁਬਾਰਾ ਇਹਨਾਂ ਦੇ ਹੱਥਾਂ ਬੰਬ ਟੁਕੜੇ ਅੱਡ ਕਰ ਕੇ ਇਹਦੇ ਸਰੀਰ ਦੇ ਇਹ ਕੁਝ ਕਰ ਜੋਗਾ ਨਹੀਂ ਰਹਿਦਾ ਯਾਦ ਵੀ ਤੇ ਹੋਏ ਬਾਹਾਂ ਲੱਗ ਜਣ ਦੋਇ ਲਤਾ ਹੋ ਜਣ ਇਹ ਜਾਨ ਵੀ ਹੋਵੇ ਕਰੂਗੀ ਉੱਠਦਾ ਸਕਦਾ ਮਰੇ ਦੇ ਬਰਾਬਰ ਹੀ ਆ ਉਹ ਹੂੰ ਇਹ ਤਾਂ ਹੋ ਗਿਆ ਇਸ ਘਰ ਚ ਹੂੰ ਉਹਦਾ ਮਨ ਉਹਨੇ ਦੇਸ਼ਕ੍ਰੀਏ ਹੋ ਗਿਆ ਦੇਸ਼ਕ੍ਰੀਏ ਜਦ ਬਕਾਰੇ ਨਹੀਂ ਰਹੇ ਤੇ ਦੇਸ਼ਕ੍ਰੀਏ ਹੋ ਗਿਆ ਰਿਹਾ ਅਰਥ ਇਹ ਦੇਸ਼ਕ੍ਰੀਏ ਆਪਾਂ ਵਰਤਾਂਗੇ ਨੇ ਓਕੇ ਉਹ ਆਪਣੀ ਸਬਰਥੇ ਜੋ ਜਿਹੜਾ ਰਹੇ ਜਿਹੜਾ ਮਨ ਸੋਚਣ ਦੇ ਸਬਰਥ ਨਹੀਂ ਰਿਹਾ ਅਨੁਸ਼ਕਰੀ ਹੋ ਗਿਆ ਹੂੰ ਹੂੰ ਉਹ ਜੋ ਆਪਣੀ ਸੋਚਣ ਸ਼ਕਤੀ ਹੀ ਜਿਹੜਾ ਕਵਾਲ ਬਈ ਹੂੰ ਹੂੰ ਸ਼ਕਤੀ ਹੀ ਜੀ ਖਤਮ ਹੋ ਜੂਵੇ ਹੂੰ ਹੂੰ ਉਹ ਸੁਣ ਬੋਲ ਠੀਕ ਜੀ ਖੰਨ ਸਹਾਰਿਓ ਨਹੀਂ ਜੇ ਜੇ ਤੋ ਸਹਜ ਜਿਤ ਕਰਕੇ ਜਾਗਦਾ ਮਾਨ ਕਰਕੇ ਚੁੱਪ ਅੱਛਾ ਇਹ ਐ ਸਹਜ ਸੁਣ ਕੇ ਘਾਟ ਹੂੰ ਹੂੰ ਮਨ ਸੁਣਦਾ ਚੁੱਪ ਹੈ ਬੋਲਦਾ ਨਹੀਂ ਉਹ ਹੈ ਮਨ ਵਿੱਚ ਛਾ ਹੈ ਜੀ ਮਨ ਵਿੱਚ ਮਾਇਆ ਦੀਆਂ ਕਾਮਾ ਦੀਆਂ ਉਹ ਖਤਮ ਹੋ ਗਈਆਂ ਜਿਤ ਕੀ ਇੱਛਾ ਰੋਕਦੀ ਸੀ ਉਹ ਪੂਰੀ ਹੋਣ ਨੂੰ ਤਿਆਰ ਹੈ ਇਸੇ ਕਰਕੇ ਦਸ਼ਮ ਪਾਸ਼ਾ ਕਹਰੇ ਨੇ ਪੂਰਨ ਹੋਏ ਜਿਤ ਕੀਚ ਹੂੰ ਮੇਰੇ ਜਿਤ ਇਚਾਂ ਪੂਰੀ ਹੋਣੀ ਚਾਹੀਦੀ ਹੈ ਹੂੰ ਇਹ ਸਾਜ ਸੁਪੰਦੇ ਘਾਟ ਹੈ ਦੋਏ ਵੇਲੇ ਹੋਏ ਹੂੰ ਤੂੰ ਕਾਹਨੋਂ ਦਾ ਘਾਟ ਕਹਿੰਦੇ ਬੰਦ ਇਚਾ ਹੈ ਨਹੀਂ ਜਿਤ ਕੀ ਇਚਾ ਹੈ ਜਿਹੜੀ ਇੱਕ ਆਸ ਰੱਖੋ ਬਸ ਕੋਈ ਆਸ ਹੈ ਹੂੰ ਪੂਰਤੀ ਹੋਣੀ ਹੈ ਬਾਕੀ ਉਹ ਰੋਭ ਦੀ ਕੁਰਤੀ ਆ ਨਾ ਉਹਦੀ ਭੁੱਖ ਦੇ ਵੇਚ ਘਰ ਦਾ ਸਾਰਾ ਲਿਆ ਹੋਇਆ ਨਿਜ ਘਰ ਦੇ ਸਾਰੇ ਬੈਠਾ ਸਰੀਰ ਦਾ ਸਾਰਾ ਲਈ ਹੈ ਅੱਛਾ ਜੀ ਸਰੀਰ ਦਾ ਕੋਈ ਸਹਾਰਾ ਨਹੀਂ ਸਰੀਰ ਦੀ ਟੇਕ ਹੈ ਨਹੀਂ ਦੀ ਟੇਕ ਹੈ ਜੀ ਕੁੜੀ ਦੀ ਛੁੱਟੀ ਹੋਈ ਹੈ ਪਾਇਆ ਦਾ ਸਹਾਰਾ ਲਈ ਹੈ ਹੂੰ ਵਾਇਦਾ ਸਾਰਾ ਲਈ ਹੋ ਵਾਇਦਾ ਦੀ ਟੈਕੀ ਠੀਕ ਹੈ ਦੀ ਔਰ ਤੁਹਾਨੂੰ ਸਾਰਾ ਠੀਕ ਹੈ ਨਾਮ ਲਾਗ ਜਗ ਉਧਰਿਓ ਸਤਗੁਰ ਹਿਰਦੈ ਲੈਵਲ ਤੇ ਸਾਰੇ ਦੀ ਲੋੜ ਹੈ ਤੇ ਨਹੀਂ ਤੇ ਕਿਸੇ ਸਾਰੇ ਦੀ ਲੋੜ ਨਹੀਂ ਠੀਕ ਹੈ ਜੀ ਸਰੀਰ ਦੀ ਕੋਈ ਭੁੱਖ ਨਹੀਂ ਸਰੀਰ ਦੇ ਕੋਈ ਦੁੱਖ ਦੀ ਦੂਰ ਕਰਨ ਦੀ ਇੱਛਾ ਨਹੀਂ ਹਮ ਆਦਮ ਬੀੜਾ ਦੇਨ ਵਾਲ ਦੀ ਲੋੜ ਤਾਂ ਹੈ ਹਮ ਸਰੀਰ ਦਾ ਨਾਲ ਉਤੇ ਹੂੰ ਜਿਹੜਾ ਨਰੂਲ ਲੱਗਿਆ ਉਹਦਾ ਹੀ ਘਾਰ ਹੋਇਆ ਹੂੰ ਸਾਧਗੁਰ ਰੇਦਾ ਸਾਰੇ ਪਟਾਇਓ ਜਿਹੜਾ ਨਰੂਲ ਜੁੜਿਆ ਉਹ ਸਤ ਦਾ ਸਾਧਗੁਰ ਨੂੰ ਹੇਰਦੇ ਜੁਕਸਾਇਆ ਹੂੰ ਸਾਧਗੁਰ ਨੂੰ ਹੇਰਦੇ ਸਾਧਗੁਰ ਦੇ ਆਪੇ ਗਿਆ ਉਹ ਕਹਿਣਾ ਮਤਲਬ ਹੈ ਠੀਕ ਹੈ ਪ੍ਰਗਟ ਹੋ ਗਿਆ ਠੀਕ ਹੈ ਜੀ ਸਤਪੁਰ ਕੇ ਜਾਣ ਲਿਆ ਆਪ ਹੀ ਸਤਗੁਰ ਐ ਇਹਦੇ ਦਿਖਾਇਓ ਇਹਦੇ ਦਿਖਾਇਓ ਹਾਂਜੀ ਜੀ ਅਰਜਨ ਕਾਲ ਉਚਰੇ ਤੈ ਜਨਕ ਹੈ ਕਲਸ ਦੀ ਪਾਇਓ ਆ ਗੁਰ ਅਰਜਨ ਕਾਲ ਉਚਰੇ ਤੈ ਕਿਆ ਕਹ ਕਲਸ ਦੀ ਪਾਇਓ ਹੂੰ ਹੂੰ ਕਾਲਾ ਪਟ ਕਹਿੰਦਾ ਗੁਰ ਅਰਜਨੂ ਤੂੰ ਜਨਕ ਕਿਆ ਬੁਲ ਕਹੈ ਕਲ ਸੁਧੀ ਪਾਇਓ 베ਰਾ ਹਿੰਦਾ ਸੇ ਗੱਲ ਕਰਦਾ ਜਾਨ ਆਪਣੇ ਆਪ ਨੂੰ ਕਹਿੰਦਾ ਮਾਪਟ ਹਾਂਜੀ ਜਾਨ ਨੂੰ ਆਡਾ ਕਹੈ ਆਡਾ ਹੂੰ ਕਿਆਨ ਕਹੈ ਜਾਨ ਦਾ ਮੇਰਾ ਹੂੰ ਫਿਰਦਾ ਰੋਸ਼ਨ ਕੀਤਾ ਹੂੰ ਇਤੋਂ ਮੈਨੂੰ ਰੋਸ਼ਨੀ ਦੀ ਪਾਇਓ ਦਾ ਮਜ਼ਾ ਰੋਸ਼ਨ ਕੀਤਾ ਰੋਸ਼ਨਾਇਆ ਤਾਂ ਮੇਰਾ ਹਿਰਦਾ ਤਾਂ ਮੈਂ ਤੁਹਾਡੇ ਸੰਪਰਕ ਤਾਂ ਗੁਰअर्जुन ਨਾਲੇ ਹੈ ਨਾ ਕੱਲ ਪੜ੍ਹਦਾ ਹਾਂਜੀ ਹਾਂਜੀ ਉਹ ਦੂਜੇ ਦੀ ਤਾਂ ਬਾਣੀਓ ਨਾ ਅਜੀ ਦੱਸਦੀ ਮੇਰਾ ਰੋਸ਼ਨ ਕੀਤਾ ਨਹੀਂ ਗੁਰ ਅਰਜਨ ਪੁਰਖ ਪ੍ਰਮਾਨ 파ਰਥੋ ਚੱਲੇ ਨਹੀਂ ਚਲ ਨਹੀਂ ਗੁਰ ਅਰਜਨ ਪੁਰਖ ਪ੍ਰਮਾਨ 파ਰਥੋ ਚੱਲੇ ਨਹੀਂ ਇਹ ਗਾਇਆ ਨੇ 파ਰਥ 나ਹਾ 파ਰਥ ਨੂੰ ਠੀਕ ਹੈ ਜੀ ਹਾਂ 파ਰਥ ਅਰੇ ਜੇ ਕੋਈ ਪਾਰਸਨਾਥ ਥਾਣਾ ਪਹਿਲਾਂ ਹੂਕ ਨਾ ਹੋ ਸਾਨੂੰ ਕੋਈ ਪਤਾ ਨਹੀਂ ਹੂੰ ਅੱਜ ਸਾਡੇ ਸਾਹਮਣੇ ਜੇ ਅਸੀਂ ਉਸ ਉਹੇ ਜਿਹਾ ਪਾਰਸਨਾਥ ਕੋਈ ਦੇਖਣਾ ਆ ਗੁਰਦੁਆਰਾ ਜਣ ਹੈਗਾ ਸਾਡੇ ਕੋਲ ਹੂੰ ਸਕਦੇ ਹਾਂ ਸਾਡੇ ਕੋਲ ਪ੍ਰਮਾਣ ਹੈ ਹੂੰ ਪਾਰਸਨਾਥ ਦਾ ਵੀ ਆ ਜਿਹੜਾ ਗੁਰਦੁਆਰਾ ਜਣ ਹੈ ਨਾ ਜਾਇ ਜਾਇ ਲਿਖਿਆ ਹੋਇਆ ਹੈ ਹੂੰ ਉਹ ਉਹ ਪਾਰਥ ਵਾਲੇ ਕੋਣ ਇਹਦੇ ਤਾਂ ਹੈਗੇ ਕ੍ਰਿਸ਼ਨ ਚੋ ਗੋਲ ਰਹੀ ਸੀਗੇ ਹੂੰ ਹੂੰ ਹਾਂ ਮੈਨੇ ਪਾਰਥ ਤਾਂ ਅਰਜਨ ਨੂੰ ਕਹਿੰਦੇ ਆ ਸੀ ਅਰਜਨ ਦਾ ਨਾਮ ਤਾਂ ਪਾਰਥ ਹੈ ਵੀ ਅਰਜਨ ਦਾ ਵੈਸੇ ਠੀਕ ਹੈ ਜੀ ਅਸੇ ਅਰਜਨ ਦਾ ਨਾਮ ਵੀ ਅਰਜਨ ਤਾਂ ਆਪਣੇ ਬੁਖਾਰ ਦਿੱਤਲੇ ਪਾਰ ਤੋਂ ਉਹ ਅਰਜਨ ਨੇ ਬਖਾਰ ਨਹੀਂ ਸੀ ਤੇ ਉਹਦਾ ਬਾਹਰ ਹੋਰ ਜੁੱਤੀ ਨਹੀਂ ਲੋਕ ਕਾਲ ਜਿੱਥੇ ਆਪਣਾ ਮੰਦੀ ਸੀ ਜਿੱਥੇ ਜਿਹੜਾ ਆਪਣਾ ਮੁਰਜਤ ਲਵੇ ਉਹ ਪਾਰ ਸੁਧ ਠੀਕ ਹੈ ਪਾਰ ਅਸਲ ਪਾਰਕ ਉਹ ਆ ਜੇ ਨਾ ਦੁੱਤ ਜਿੱਥੇ ਅਰਜਨ ਨੇ ਮੁਰਜਤਿਆ ਨਹੀਂ ਸੀ ਉਹ ਤਾਂ ਪਾਰ ਤਾਂ ਸੀਦੀ ਬਣ ਸਕਦੇ ਉਹ ਅੱਜ ਸਾਡੇ ਕੋਲ ਅਰਜਨ ਹੈ ਜੈਪੁਰ ਹੂੰ ਹੂੰ ਇਹ ਕਿਹੜਾ ਪਰਮੁਖਰ ਦੇ ਸਕਦੇ ਆ ਜੀ ਜੀ ਇਹ ਅਸਲੀ ਪਾਰਥ ਹੂੰ ਹਾਂ ਜੀ ਨਿਜਾ ਨਾਮ ਨਿਸ਼ਾਨ ਸਤਗੁਰ ਸ਼ਬਦ ਸਵਾਰਿਓ ਇਹ ਕੀ ਆ ਕੀ ਆ ਕੋ ਨਾਮ ਦਾ ਨਾਮ ਨਾਲ ਆਹ ਗਿਆ ਨਹੀਂ ਹੈ ਹੂੰ ਹੂੰ ਕਿ ਤਾ ਵੇ ਗਿਆ ਨੋ ਵੀ ਨੋ ਨਾ ਤੁਰਕੀ ਬਾਣੀ ਆਉਂਦੀ ਹੈ ਸ਼ਬਦ ਗੁਰੂ ਆਲਾ ਨਾਮ ਹੂੰ ਜੋ ਲੋਕ ਜੇ ਤਣੇ ਦਰਗਾਹਾਂ ਆ ਰਿਹਾ ਉਹਨੂੰ ਲੋਭ ਦਿਖੋ ਦੇ ਜੀ ਹੂੰ ਆਇਆ ਦੂਆ ਗੁਰਬਾਣੀ ਜਿਹਨਾਂ ਨੂੰ ਸੁਣਾਇਆ ਇਹਨੂੰ ਹੱਲ ਲੋਭ ਕਹਿੰਦੇ ਨੇ ਹੱਲ ਲੋਭ ਉਹਨੇ ਕਹਤਾ ਹਰ ਨਾਮ ਆਇਆ ਨਾ ਇਹ ਨਾਮ ਨੇ ਸਾਲ ਨੇ ਠੀਕ ਹੈ ਇਹ ਜਮਾਇਆ ਨਹੀਂ ਹੈ ਹੂੰ ਜਿੱਦਾਂ ਦਰਗਾਹ ਤੋਂ ਮਖੜ ਇਹ ਹੋਇਆ ਹੂੰ ਇਹ ਆਵਾਜ਼ ਆਉਂਦਾ ਹੈ ਸ਼ਬਦ ਰੂਪ ਚ ਆਉਂਦਾ ਹੈ bina color te sunn wala sunnda hai ਆਵਾਜ਼ ਅਬਦੇ ਪਰ ਬੋਲਣ ਦਾ ਸ਼ਬਦ ਲੀਆ ਹੂੰ ਹੂੰ ਭਾਇਆ ਨਹੀਂ ਹੈ ਇਹ ਜਵਾਬ ਨਹੀਂ ਹੈ ਇਹਦੇ ਵਿੱਚ ਠੀਕ ਹੈ ਜੀ ਲਓ ਜੀ ਨੀਜਾ ਨਾਮ ਨਿਸ਼ਾਨ ਸਤਿਗੁਰ ਸ਼ਬਦੀ ਸਵਾਰਿਓ ਹਾਂਜੀ ਹਾਂ ਇਸ ਗੱਲ ਸਤਿਗੁਰ ਨੇ ਸ਼ਬਦਾਂ ਨਾਲ ਸਤਿਗੁਰ ਨੇ ਆਪਣੇ ਉਪਦੇਸ਼ ਨਾਲ ਸਵਾਰਿਓ ਹੂੰ ਜਿਹੜਾ ਉਸੇ ਹਾਂ ਉਸੇ ਦਾ ਹਾਂ ਜਿਹੜੇ ਉਸੇ ਨੂੰ ਸ਼ਬਦ ਦਿੱਤੇ ਜੀ ਹੂੰ ਹੂੰ ਉਹ ਨਾਮ ਨਿਸ਼ਾਨ ਨੂੰ ਸ਼ਬਦ ਦੇ ਕੇ ਨਾ ਹੂੰ ਹੂੰ ਕੇ ਭੂਲ ਕੇ ਹੂੰ ਸਾਰੂ ਦੱਸਿਆ ਸਾਤਾਰੇ ਹੂੰ ਉਹ ਆਪਣੇ ਲਫ਼ਜ਼ ਦੇ ਕੇ ਉਸ ਨਾਮ ਨੂੰ ਸੰਸਾਰ ਦੇ ਸੰਸਾਰ ਦੇ ਲੋਕਾਂ ਦਾ ਜਿਹੜਾ ਪਰਪੂਰ ਕੀਤਾ ਸੰਸਾਰ ਦੇ ਲੋਕਾਂ ਦੀ ਬੁੱਧੀ ਸਵਾਰੀ ਹੈ ਉਹਨਾਂ ਦਾ ਗਿਆਨ ਸਵਾਰੀ ਹੈ ਠੀਕ ਹੈ ਜੀ ਹਾਂ ਭਵਜਲ ਸ਼ਾਇਰ ਸੀਤ ਨਾਮ ਹਰੀ ਕਾ ਬੋਹਿთა ਭਵਜਲ ਕੀ ਹੈ ਹਾਂ ਭਵਜਲ ਤਾਂ ਹੈ ਸੰਸਾਰ ਠੀਕ ਜੀ ਸ਼ਾਇਰ ਜਿਹੜਾ ਹੈਗਾ ਟਾਡੀ ਜਿਹਨੂੰ ਕਹਿੰਦੇ ਨੇ ਟਾਡੀ ਵੀ ਕਹਿੰਦੇ ਨੇ ਸ਼ਾਇਰ ਵੀ ਕਹਿੰਦੇ ਨੇ ਕਵੀ ਸ਼ਾਇਰ ਹਾਂਜੀ ਸ਼ਾਇਰ ਵੀ ਜਨ ਨੇ ਸ਼ਾਇਰ ਤਲੂਕ ਇਹਨੂੰ ਵੀ ਕਹਿੰਦੇ ਹੁੰਦੇ ਸਮੁੰਦਰ ਨੂੰ ਵੀ ਆ ਗਿਆ ਪੁੱਛ ਅੱਛਾ ਇੱਥੇ ਇੱਥੇ ਢਾਡੀ ਨਹੀਂ ਹੱਥ ਲੈਣੇ ਕਿਉਂਕਿ ਸੇਤ ਆ ਗਿਆ ਠੀਕ ਹੈ ਜੀ ਨਾਮ ਹਰੀ ਕਾ ਵੀ ਆ ਗਿਆ ਜੀ ਹਾਂਜੀ ਹੈ ਵੀ ਆ ਗਿਆ ਉਹ ਤਾਂ ਅਕਰ ਗਿਆ ਹਰੀ ਦਾ ਨਾਮ ਹੈ ਉਹ ਤਾਂ ਕਹਿ ਲੋ ਚਾਹੇ ਹੂੰ ਪਾਈ ਕੋਲ ਕਹਿ ਦੋ ਠੀਕ ਹੈ ਜਾਂ ਐਂ ਅਸੀਂ ਹੂੰ ਪਗ ਜਲ ਤਾਂ ਹੈ ਜਿਹੜਾ ਸਾਇਦਾ ਹੈ ਉਹ ਸੇਤੂ ਹੈ ਗੁਰਮੁਖਵਾਂ ਦੇ ਉਹ ਸੇਤੂ ਬਿਦਾਤੇ ਇਹਦਾ ਨਾਮ ਹੈ ਰੀਕਾ ਉਹ ਬੋਲਦਾ ਠੀਕ ਹੈ ਤੋਂ ਅੰਜ ਫਰਕ ਕਰ ਸਕਦੇ ਆ ਫਿਰ ਅਸੀਂ ਹੂੰ ਕਿਹੜਾ ਬੋਲਣ ਵਾਲਾ ਆਦਮੀ ਹੈ ਅਰ ਜੀ ਤੁਹਾਨੂੰ ਦੋਜ ਫਰਕ ਹੈ ਨਾਮ ਬੋਲਦਾ ਹੈ ਇਹ ਜਿਹੜਾ ਫਾਇਰ ਹਾਉਸ ਹੈ ਤੇ ਕੋਲ ਹੈ ਠੀਕ ਹੈ ਜੀ ਦਾ ਰੂਪ ਕਰ ਹੁਣ ਦਾ ਕੀ ਉਹ ਵੇਰੂ ਅਪ ਕਰ ਠੀਕ ਤੂੰ ਤੂੰ ਸਤਗੁਰ ਸੰਗ ਹੀਤ ਲਾਗ ਜਗ ਉਧਰਿਓ ਤੋਏ ਸਤਗੁਰ ਸੰਗ ਹੀਤ ਇਹੋ ਜੇ ਤੈਨੂੰ ਜੇ ਸਤਗੁਰ ਦੇ ਨਾਲ ਸਤਗੁਰ ਸੰਤ ਹੀਤ ਇਸ ਨੂੰ ਫੇਸ ਕਰ ਦਿੱਤਾ ਹਮਮ ਸਤਗੁਰ ਦੇ ਨਾਲ ਜੇ ਤੈਨੂੰ ਪਿਆਰ ਆ ਲਾਗ ਹਾਂਜੀ ਜਦ ਉਧਰ ਇਨਾਮ ਦੇ ਨਾਲ ਲਾ ਕੇ ਤੁਸੀਂ ਸੰਸਾਰ ਹੋ ਸਕਦੇ ਹੋ ਹੂੰ ਜੇ ਤੁਸੀਂ ਸਮਝਦੇ ਹੋ ਹੂੰ ਵੀ ਸਾਧਗੁਰ ਮੇਰੇ ਹਿੱਤ ਵਿੱਚ ਹੈ ਹੂੰ ਦੇ ਬਚਨਾਂ ਨੂੰ ਆਪਣੇ ਹਿੱਤ ਵਿੱਚ ਸਮਝਦੇ ਹੋ ਭਲੇ ਵਿੱਚ ਬੁੱਲ ਲਓ ਤਾਂ ਤੁਸੀਂ ਪਾਰ ਹੋ ਸਕਦੇ ਹੋ ਜੇ ਤੁਸੀਂ ਸਤਗੁਰ ਦੇ ਬਚਾਂ ਤੇ ਸ਼ੱਕ ਕਰੋਗੇ ਬੇ ਰਹਿ ਜਾਓਗੇ ਇਹ ਗੁਰਬਾਣੀ ਨੂੰ ਹਟਕਾ ਲਈ ਬੰਦੂਗੇ ਆਪ ਅਭਜਲ ਪਾਰ ਕਰ ਲੈਣਗੇ ਜਿਹੜੇ ਲੋਕ ਹਟਕਾ ਜਾਣਗੇ ਜਿਹੜੇ ਨੇ ਜਹਾਜ ਤੇ ਚੜਨਾ ਹੀ ਨਹੀਂ ਹਾਂਜੀ ਜਗਤ ਉਧਾਰਨ ਨਾਮ ਸਤਗੁਰ ਪਾਇਓ ਜਗਤ ਉਹਦਾ ਨਾਮ ਸਤਗੁਰ ਕੋਈ ਫੇਪਾਇਓ ਦਾ ਨਾਮ ਜਗਤ ਤੋਂ ਉਧਾਰ ਕਰਨ ਮਿਲ ਜਾਂਦੇ ਠੀਕ ਹੈ ਕੋਰ ਤੋਂ ਮਿਲਦਾ ਸਤਗੁਰ ਟੁੱਠੇ ਪਾਇਦਾ ਹੈ ਜੀ अब नाहि अवर सरकाम बात अंतर पड़ी अब नाहि कोई कब रह ही नहीं गया पूरी पड़ी पूरी पड़ी सादा घरे ਬਾਰ ਅਕਤਰ ਸਾਡਾ ਘਰਵਾਰ ਦੇ ਅੰਦਰ ਹੀ ਹਿਰਦੇ ਦੇ ਅੰਦਰ ਹੀ ਸਭ ਕੁਝ ਸਰ ਗਿਆ ਦੋਈ ਮਿਲ ਗਿਆ ਜੋ ਗੱਲਾਂ ਸੀ ਬਾਰ ਅਕਤਰ ਸਾਡਾ ਤਾਂ ਹਿਰਦੇ ਚ ਗਿਆ ਸਤਿਗੁਰੂ ਵੀ ਉੱਥੇ ਹੀ ਵੀ ਉੱਥੇ ਹੀ ਹੈ ਮਿਲ ਗਏ ਬਾਹਰ ਫਿਰ ਕਿਸੇ ਨੇ ਕੀ ਕੰਮ ਨੇ ਪੂਰੀ ਭਰੀ ਜੀ yeah. ਹੂੰ mm.